ਸ਼ਲੋਕ ਮਹੱਲਾ ਪੰਜਵਾਂ ਗੁਰ ਨਾਨਕ ਹਰ ਨਾਮ ਦਰੜਾਇਆ ਭੰਨਣ ਘੜਨ ਸਮਰੱਥ ਪ੍ਰਭ ਸਦਾ ਸਮਾਨਲੇ ਮਿੱਤਰ ਤੂੰ ਦੁੱਖ ਸਬਾਈਆ ਲਤ ਗੁਰੂ ਨਾਨਕ ਨਾਮ ਦਰੜਾਇਆ ਹਰ ਨਾਮ ਗੁਰੂ ਨਾਨਕ ਦੇ ਨਾਮ ਦਰੜਾਇਆ ਨਾਮ ਦ੍ਰਿੜ ਕਰਵਾਇਆ ਗਿਆਨ ਦ੍ਰਿੜ ਕਰਵਾਇਆ ਜਿਹੜਾ ਨਾਮ ਕਹੇ ਉਹ ਐਸਾ ਗਿਆਨ ਹੈ ਭੱਦ ਵੀ ਦਿੰਦਾ ਹੈ ਕੜਵੀ ਦਿੰਦਾ ਹੈ ਪੜ੍ਹਨ ਦਾ ਟਰਣ ਸਭ ਰੱਥ ਹੈ ਫੜ੍ਹ ਪੜ੍ਹਨਾ ਕਿਨੂ ਆ ਮਨਮਤ ਪੜ੍ਹਣਾ ਇਹਦੀ ਪਹਿਲੀ ਮੱਤ ਬਣੀ ਹੋਈ ਹੈ ਨਾ ਪਹਿਲੀ ਸਾਡੀ ਬਾਣਤਾ ਬਣੀ ਹੋਈ ਹੈ ਬੁੱਧ ਉਦ ਪੜ੍ਹਦੇ ਨੇ ਏਹ ਗੱਲ ਤਾਂ ਛਿੱਟੋਂ ਗੱਲ ਤਾਂ ਉਥੋਂ ਹੀ ਪੜ੍ਹਨਾ ਛਿੱਟੋਂ ਗੱਲ ਤਾਂ ਉਥੋਂ ਪੜ੍ਹ ਦੇਣਾ ਔਰ ਉਹਨੂੰ ਕੜਵੀ ਦੇਣਾ ਉਥੋਂ ਠੀਕ ਵੀ ਗੱਲ ਦਿੰਦੇ ਨਿਵਾ ਡਰਟਿੰਗ ਵਾਲੇ ਹੁੰਦੇ ਨੇ। ਉਹ ਜੇ ਗੱਡੀ ਲੱਗ ਜਾਣਾ ਉੱਥੋਂ ਕੇ ਉਹ ਠੀਕ ਨੇ। ਐ ਨਹੀਂ ਆ ਦੋ ਚਾਲ ਥੋੜੇ ਹੋਰ ਮਾਰ ਕੇ ਜਿਆਦਾ ਜਿਵੇਂ ਫੇਕ ਲੈਂਦੇ ਨੇ। ਠੀਕ ਹੈ ਜੀ। ਇੱਥੇ ਹਰਨਾਮ ਲਿਖਿਆ ਨਾ ਗੁਰੂ ਨਾਨਕ ਹਰਨਾਮ ਦਰਵਾਇਆ। ਇਹਦਾ ਮਤਲਬ ਇਹ ਗਿਆਨ ਹੈ ਜੀ। ਗਿਆਨ ਉਹ ਵੀ ਗਿਆਨ ਨਾਲੇ ਕਰਦੇ ਨੇ ਇਹ ਗਿਆਨਾ ਹੋਵੇ। ਉਗੜ ਟੈਂਟੇ ਕੱਢ ਦੇਣਗੇ ਠੀਕ ਹੈ ਜੀ ਹਰ ਕੰਮ ਹੋਣਾ ਤਾਂ ਗਿਆਨ ਨਾਲੇ ਹੋਣਾ ਹੈ ਟੈਂਟੇ ਵੀ ਬੜੀ ਗਿਆਨ ਦੀ ਗੱਲ ਹੈ ਜਿੱਥੇ ਵੀ ਬੁੱਧੀ ਦੇ ਵਿੱਚ ਨੁਕਸ ਪਿਆ ਹੋਇਆ ਗਲਤ ਧਾਰਨਾ ਪਈ ਹੋਈ ਹੈ ਗਲਤ ਗੱਲ ਸੁਣ ਕੇ ਗਲਤ ਧਾਰਨਾ ਬੜ ਗਈ ਉਹ ਗਲਤ ਧਾਰਨਾ ਨੂੰ ਛਡਵਾ ਦੇਣਾ ਛਡਵਾ ਕੇ ਉਹਦੀ ਜਗ੍ਹਾ ਠੀਕ ਧਾਰਨਾ ਜਿਹੜੀ ਸਮਝਾ ਦੇਣੀ ਠੀਕ ਹੈ ਜੀ ਪ੍ਰਭ सदा ਸਮਾਲੈ ਮਿੱਤਰ ਤੂੰ ਦੁੱਖ ਸਬਾਈਆ ਲੱਤ ਹੈ ਪ੍ਰਭ ਤੂੰ ਤਾਂ ਸਦਾ ਸਮਾਇਆ ਰਹਿੰਦੇ ਮਿੱਤਰ ਬਣ ਕੇ ਜੇ ਮਿੱਤਰ ਮਿੱਤਰ ਦੇ ਜਦ ਤੱਕ ਜ਼ੀਰੋ ਹੋਵੇ ਤੋ ਇਹ ਸਵਾਦ ਤਰਾਹ ਆਇਆ ਕਰਕੇ ਕਹਿ ਰਹਾ ਹੂੰ ਵੀ ਤਾਕਤ ਮਨ ਨੂੰ ਦੱਸਿਆ ਇਹ ਆਹ ਬਦੂ ਦੱਸਿਆ ਮਨ ਗੁਰਮਖੋ ਹੈ ਮਨ ਹੋਇਆ ਇੱਕੋ ਹੀ ਗੱਲ ਹੈ ਠੀਕ ਹੈ ਕਹਿੰਦਾ ਮਤਲਬ ਹੈ ਕਿ ਮਨ ਪ੍ਰਭ ਨੂੰ ਸੰਭਾਲ ਲੈ ਹਮੇਸ਼ਾ ਆਪਣੇ ਮੂਲ ਉਹਰਾ ਸੋਚ ਕੇ ਨਾ ਜਾਵੇ ਭਲਾ ਸੋਚ ਕੇ ਜਾਵੇ ਆਪਣਾ ਭਲਾ ਉਹਦਾ ਦਾ ਭਰਾ ਕੀ ਕਰੂਗਾ ਨਾਲੇ ਭਲਾ ਕੀ ਕਰੂਗਾ ਆਪਣਾ ਭਲਾ ਸੋਚ ਕੇ ਜਾਵੇ ਉਹਨੂੰ ਮਿੱਤਰ ਸਮਝ ਕੇ ਜਾਵੇ ਕਹਿਣਾ ਕੇ ਜਾਵੇ ਦਿਲ ਦੀ ਲੋੜ ਨਹੀਂ ਹੈ ਦਰਦੇ ਨੇ ਲੋਕ ਡਰਾਈ ਹੋਏ ਨੇ ਲੋਕ ਰਬ ਤੇ ਦਿਲ ਦੀ ਲੋੜ ਨਹੀਂ ਮਿੱਤਰ ਬਣ ਕੇ ਜਾਵੇ ਉਹ ਸਭ ਨੂੰ ਮਿੱਤਰ ਮੰਨਦਾ ਅਸੀਂ ਉਹ ਤਾਂ ਸਾਡੇ ਮੰਨ ਦੇ ਵਿੱਚ ਹੈ ਨਾ ਵੈਰ ਭਾਵਨਾ ਨੂੰ ਕਵਾਸਤ ਉਹਦੇ ਮਨ ਚ ਤਾਂ ਹੈ ਹੋਰੀ ਜਦ ਉਹਦੇ ਮਨ ਚ ਹੈ ਦੀ ਤਾਂ ਮਿੱਤਤ ਹੋ ਕੇ ਜਾਈਏ ਉਹ ਤਾਂ ਪਹਿਲਾਂ ਹੀ ਸਰਵੰਨੀ ਬੈਠਾ ਤਾਂ ਸਭ ਕੋ ਮੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਮਾ ਬੇਰੋ ਦੇ ਪਿੱਛੇ ਪਿੱਛੇ ਦਾ ਬੋਲਦਾ ਐ ਐ ਬੋਲ ਹੰਤਾ ਬੋਲੀ ਸਿਖਾਈਆ ਵੀ ਐ ਬੋਲੀ ਦਾ ਹੁੰਦਾ ਜਿਵੇਂ ਪਹਿਲਾਂ ਬੋਲਦਾ ਮੇਰੀ ਬੋਲੀ ਦਾ ਹੁੰਦਾ ਸਭ ਕੋ ਵੀ ਤਾਂ ਨਾ ਅਸੀਂ ਉਸ ਵਰਕੇ ਨਾ ਹਾਂਜੀ ਇਕੱਲਾ ਮਨ ਬੋਲੇ ਤਾਂ ਮੈਂ ਵਰਤੇ ਅੱਛਾ ਜੀ ਕਿਤਨਾ ਬੁਲਾਇਆ ਮਨ ਨੂੰ ਤੂੰ ਮੇਰੇ ਨਾਲ ਬੋਲ ਤਾਂ ਹਮ ਬੋਲੇ ਕੁਦਿਆ ਬੋਲਣਾ ਫਿਰ ਤਾਂ ਹੁਦੈ ਕਹਾਂਗੇ ਹਾਂਜੀ कला ਕੱਲਾ ਬੋਲੂਗੇ ਕਹੂਗਾ ਹੋਜੀ ਮਹੱਲਾ ਪੰਜਵਾਂ ਖੁਦਿਆਵੰਤ ਨਾ ਜਾਣਈ ਲਾਜ ਕੁਲਾਜ ਕਬੂਲ ਨਾਨਕ ਮੰਗੇ ਨਾਮ ਹਰ ਕਰ ਕਿਰਪਾ ਸੰਜੋਗ ਖੁਦਿਆ ਬੰਤੇ ਜਿਹੜਾ ਵਿਚਾਰਾ ਭੁੱਖਾ ਹੈ ਖੁਦਿਆ ਭੁੱਖ ਨੂੰ ਇਹਦੇ ਅੰਦਰ ਭੁੱਖ ਹੋਵੇ ਉਹ ਵਿਚਾਰਾ ਕੀ ਜਾਣੇ ਭੁੱਖਾ ਹੋਵੇ ਨਾ ਤਾਂ ਉਹ ਮਜਾਰੇ ਨੂੰ ਜਿਹੜਾ ਭੁੱਖਾ ਮੰਗਦਾ ਫਿਰਦਾ ਦੀ ਗੱਲ ਕਰੂੰ ਤਾਂ ਕਿਥੋਂ ਇਸ ਕਰਕੇ ਮੈਨੂੰ ਲਾਜ ਨਹੀਂ ਹੈ ਜੀ ਮੈਨੂੰ ਤਾਂ ਭੁੱਖ ਹੈ ਬਹੁਤ ਜਿੰਨਾ ਕਹਿੰਦਿਆ ਵੰਤ ਨੂੰ ਲਾਜ ਕੋ ਲਾਜ ਹੁੰਦੀ ਨਾ ਕੋ ਕੋਈ ਬੋਲ ਦੂ ਅੱਗੋਂ ਮੈਨੂੰ ਬੋਲ ਇਹ ਦੇ ਬਗਾਰ ਦੋਈ ਗਾਉ ਕਬੋਲ ਦੀ ਸ਼ਰਮ ਕਹਿੰਦੇ ਉਹ ਲਾਹਤੀ ਹੋ ਮੈਂ ਲੋਈ ਓਹੰਕਾਰ ਦੀ ਲੋਈ ਸੀ ਇਹ ਅੱਛਾ ਜੀ ਨਹੀਂ ਤਾਂ ਹੰਕਾਰ ਦੀ ਗਾਹ ਹੰਕਾਰ ਹੋਰ ਕੀ ਸੀ ਅਸਲ ਤੇ ਹੰਕਾਰ ਵਾਲੀ ਲੋਈ ਹੈ ਬਨੇ ਸੇ ਜਾਏ ਉਹ ਕਹਿੰਦਾ ਕਲਸੀਦਾਸ ਇਸੇ ਕਰ ਕਹਿੰਦੇ ਨੂੰ ਉੱਗਣ ਜਾਓ ਅੱਛਾ ਇਹ ਜੋਗੀ ਤੇ ਕਹਿੰਦੇ ਮੰਨ ਜਾਓ ਰਾਜ ਤਾਂ ਇਹ ਤੇ ਰੱਖ ਦੋ ਸਾਡੇ ਪੈਰਾਂ 'ਚ ਛੋਟਾ ਪਤਾ ਲੱਗੇ ਅਹੰਕਾਰ ਉਤਰ ਗਿਆ ਤੇ ਨਹੀਂ ਉਤਰ ਗਿਆ ਉਰ ਬੋਲ ਕੇ ਜੀਏ ਫੜਾਉ ਕਾ ਗੁਪਤ ਜਾਨਾ ਉਹ ਵੀ ਮਰ ਗਿਆ ਜਿਹੜਾ ਕੋਲ ਹੈਗੀ ਚੀਜ਼ ਮੁੱਕਰ ਗਿਆ ਮੈਨਰੇ ਕੋ ਹੈ ਦੀਵੇ ਦੀ ਦੀ ਜੀ ਉਰੋਂ ਦਾ ਘਾਮ ਘਾਹ ਕਹਿੰਦਾ ਤੁਸੀਂ ਦੱਸ ਪਰ ਮੈਨਰੇ ਸੇ ਮਾਣੇ ਜਾਇ ਜ਼ਰੂਰ ਗੱਲ ਆ ਆਹ ਖੋਦੇ ਆ ਬੰਤਾਂ ਮੈਂ ਮੰਗਦਾ ਤੇਰੇ ਦੱਸਦਾ ਉਹ ਮੈਨੂੰ ਕੁਲਾਜ ਨਹੀਂ ਐਥੋਂ ਦੋ ਕੀ ਜਵਾਬ ਦੇਣਾ ਦੇ ਠੀਕ ਮੈਨੂੰ ਪਤਾ ਹੀ ਆ ਮੈਂ ਅਬ ਜੋ ਕੁਝ ਕਰਦਾ ਰਿਆਂ ਕੀ ਕੀ ਮੈਨੂੰ ਜਵਾਬ ਦੇਣਾ ਪਰ ਫੇਰ ਅਬਗੋੜਨਾ ਬਚਾਰੇ ਕੋਈ ਬਾਅਦ ਚ ਪਤਾ ਲੱਗਿਆ ਜੋ ਦੌਰੇ ਤਾਂ ਚਾਰਿਆ ਹੀ ਨੀ ਗੁਣਾਵੋ ਪਤਾ ਹੀ ਨਹੀਂ ਉਹਦਾ ਕਿਹਦੇ ਤੇ ਕਿਹਾ ਨਹੀਂ ਹੋਇਆ ਵੀ ਮੈਂ ਕੋਈ ਗਲਤੀ ਕੀਤੀ ਹੈ ਵੇ ਗੁਣਾਵੋ ਗੋੜਨਾ ਕੋਈ ਠੀਕ ਹੈ ਜੀ ਆ ਜਾਂਦਾ ਹੁੰਦਾ ਬੰਤ ਕੋਈ ਮੰਨ ਕੇ ਜਦ ਮੈਂ ਕੋਈ ਭਾਈ ਕੁਝ ਕਹੇ ਜਾਂ ਅਗਲੇ ਦਿਨ ਦੌਰੇ ਤੇ ਜਾਣਾ ਦੇਤਾ ਉਹਦਾ ਵੀ ਭਲਾ ਜਿਹਦੇ ਨਹੀਂ ਦਿੰਦਾ ਉਹਦਾ ਵੀ ਭਲਾ ਇਹ ਕਹਿ ਕੇ ਚੱਲਦਾ ਤੇ ਤੇ ਉਹਦਾ ਵੀ ਭਲਾ ਨਾ ਦੇ ਉਹਦਾ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਨਾਨਕ ਮੰਗਦਾ ਕਿਹਾ ਨਾਮ ਮੰਗਦਾ ਨਾਮ ਦਾ ਮੁਕਤਾ ਚੱਲ ਪਿਆ ਠੂਠਾ ਲੈ ਕੇ ਹਰ ਨਾਮ ਮੁਕਦਾ ਫਿਰਦਾ ਇਹਦਾ ਮਤਲਬ ਹੈ ਨਾਮ ਨਹੀਂ ਪੈਂਦਾ ਖੈਰ ਕਿਤੋਂ ਲਿਖਿਆ ਤੁਰ ਹੋ ਜਿਹੜਾ ਤਰਹੁਣੇ ਕੇ ਲਿਆਇਆ ਸੀ ਇਹ ਸੰਯੋਗ ਹੈ ਜੋਗ ਨਹੀਂ ਹੈ ਜੋਗ ਨਹੀਂ ਹੈ ਜੋਗੀਆਂ ਦਾ ਜੋਗ ਜੋ ਕਿਹਦੇ ਨਾਲ ਜੋਗ ਤਾਂ ਪੱਖਰ ਨਾਲ ਵੀ ਹੋ ਸਕਦਾ ਹੈ ਤਾਂ ਥਰਡ ਪਰਸਨ ਨਾਲ ਵੀ ਹੋ ਸਕਦਾ ਸੈਕਿੰਡ ਪਰਸਨ ਨਾਲ ਵੀ ਹੋ ਸਕਦਾ ਹੈ ਸੰਯੋਗ ਸੰਯੋਗ আর ਜੋਗ ਦਾ ਫਰਕ ਹੈ ਸੰਯੋਗ ਦਾ ਹੈ ਸਵੈਮ ਨਾਲ ਜੋ ਆਪਣੇ ਆਪਣਾ ਲੋੜ ਚੋਣਨਾ ਜੋਗੀਆਂ ਨੂੰ ਤਾਂ ਇੰਨੀ ਹੀ ਗੱਲ ਨਹੀਂ ਸੀ ਜੋਗ ਨਾ ਰੱਖ ਲਿਆ ਦੋਵੇਂ ਗੱਲ ਦਾ ਜੋਗ ਦਾ ਨਾਂ ਦੋ ਬੱਚਿਆਂ ਦਾ ਵੀ ਜੋਗ ਕਹਿ ਲੈਂਦੇ ਆ ਜਦ ਵਿਆਹ ਕਰਦੇ ਆ ਕੁੜੀ-ਕੁੜੇ ਦਾ ਦੋਸਤੀ ਦਾ ਵੀ ਜੋਗ ਕਹਿ ਲੈਂਦੇ ਆ ਕਿ ਤੇਰੇ ਜੋਗ ਤੇਰੇ ਦੋਸਤੀ ਦੇ ਕਾਬਿਲ ਨਹੀਂ ਹੈ ਜੋਗ ਬਹੁਤ ਹੀ ਘਟੀਆ ਲਫ਼ਜ਼ ਹੈ ਕਲਪਨ ਸਾਰੀ ਜ਼ਿੰਦਗੀ ਜੁੜਨ ਇਹ ਨਹੀਂ ਪਤਾ ਲੱਗਿਆ ਵੀ ਯੋਗ ਜਿਹੜਾ ਲਫ਼ਜ਼ ਹੈ ਉਹਦਾ ਅਰਥ ਕੀ ਹੈ ਯੋਗ ਦਾ ਮਤਲਬ ਜੁੜ ਜਾਣਾ ਜੋੜ ਦੇਣਾ ਹੈ ਜ਼ਰੂਰ ਹੈ ਠੀਕ ਹੈ ਪਰ ਲੋਹੇ ਨੂੰ ਤਾਂ ਦੀ ਕਿ ਹਾਲ ਕਿਤੇ ਕੀਤੇ ਫੇਸ ਲੋਹੇ ਤੇ ਵੀ ਫੇਸ ਉਹ ਵੀ ਯੋਗ ਹੋ ਗਿਆ ਜੋ ਇੱਕ ਡਿਫਰੈਂਟ ਆਪਾ ਵਿਰੋਧੀ ਚੀਜ਼ਾਂ ਦਾ ਵੀ ਯੋਗ ਹੋ ਜਾਂਦਾ ਡਬਲ ਵਾਣ ਲੜਦੇ ਨੇ ਜੋਗ ਉਹ ਦੋਨਾਂ ਦਾ ਬਰਾਬਰ ਬਰਾਬਰ ਦੀ ਕੋਸ਼ਿਸ਼ ਹੀ ਛੱਡੋ ਭਾਈ ਬਰਾਬਰ ਦੀ ਕੋਸ਼ਿਸ਼ ਹੀ ਜੋਗ ਨੇ ਉਹਦਾ ਗੁਰਬਾਣੀ ਨੇ ਆ ਰਾਈਟ ਦਾ ਜੋਗ ਹੈ ਮਨਰਚਿਤ ਦੀ ਜਿਹੜੀ ਸੰਗਤ ਹੈ ਇਹ ਸੰਜੋਗ ਹੈ ਜੀ ਹੈ ਸੰਜੋਗ ਆਤਮਾ ਨਾਲ ਆਪਣੇ ਆਪ ਨਾਲ ਜੋਗ ਹੈ ਸਵੈਮ ਨਾਲ ਜੋਗ ਸਵੈਮ ਨਾਲ ਜੁੜਨਾ ਆਪਣੇ ਮੂੜ ਨਾਲ ਜੁੜਨਾ ਔਰ ਜੀ ਜਿਵੇਂ ਇਹ ਕਰਮ ਕਮਾਉਂਦਾ ਤੇ ਵੇਹੇ ਫਲਤੇ ਜੱਬੇ ਤੱਤਾ ਲੋਹਸਾਰ ਵਿੱਚ ਸੰਘੈ ਪਲਤੇ ਜਿਵੇਂ ਧਰਮ ਕਮਾਉਂਦਾ ਜਿਹੇ ਜੇ ਕਰਮ ਕਰਦਾ ਹੈ ਉਹ ਜਾਈ ਬੜ ਬਣਨਾ ਜੇ ਤੱਤਾ ਲੋਹਾ ਜਬੂਗਾ ਤੇ ਖਾਲੇ ਦਾ ਸਮਝ ਹੀ ਕਰਮ ਲੋਹਾ ਬੂਝ ਪਾਊਗਾ ਉਹਦੇ ਸੰਨ ਦੇ ਵਿੱਚ ਛਾਲੇ ਦਾ ਪੈਣੀ। ਵਿਯੋਧਾ ਅਸ ਧਰੂ ਲੋਹੇ ਦਾ ਅਸਰ ਉਹਨਾਂ ਅੰਦਰ ਹੁਣੇ ਹੀ ਹੈ। ਉਹਦੇ ਛਾਲੇ ਪੈਣਗੇ। ਕੱਤ ਕਲਾਮਾ ਚਾਲਿਆ ਤਿੰਨ ਦੂਤ ਅਮਲ ਤੇ। ਕਾਈ ਆਸਨ ਪੁੰਨਿਆ ਪਰ ਮਲ ਹਿਰਤੇ। ਗਲਾਮਾ ਫੜਲੇ ਆਗਲੇ ਨੇ। ਗਲਾਮਾ ਦਾ ਬੈਠੀ ਕਰਕੇ ਫੜੀਦਾ। ਮੇਰਾ ਕਹਿੰਦਾ ਗਲਾਮੇ ਤੇ ਫੜ ਲਿਆ। ਇਹ ਕਲਾਮੇ ਤੇ ਫੜ ਲਿਆ ਤਾਂ ਮੁਰਜਾ ਬਣ ਕੇ ਫੜਿਆ ਨਾ ਗਲਾਮਾ ਫੜ ਕੇ ਕਾਲ ਲਿਆ ਮੂਰੇ ਚੱਲ ਭਾਈ ਤਾਂ ਦੂਤਾ ਹਲਤੇ ਅਮਲਾ ਜਹੇ ਦੂਤਾ ਨੇ ਕਲਾਮਾ ਫੜ ਕੇ ਮੂਰੇ ਮੂਰੇ ਕਾਲ ਲਿਆ ਠੀਕ ਫੜ ਕੇ ਫੜ ਲੈਣਾ ਲੈ ਜਾਣਾ ਇਸ ਨੂੰ ਬੇਇਜ਼ਤੀ ਕਹਿਣਾ ਕਿਸੇ ਦਾ ਕਲਾਮਾ ਫੜ ਕੇ ਪਰਾਂ ਦੇ ਵਿੱਚੋਂ ਕੋਈ ਲੈ ਜਵੇ ਇਹ ਤੋਂ ਵੱਡੀ ਬੇਇਜ਼ਤੀ ਕੀ ਹੈ ਕਿਸੇ ਨੂੰ ਕਹਿਣਾ ਹੈ ਇਜਤਨਾ ਘਰ जाना ਔਰ ਬੇਇਜਤ ਕਰ ਜਾਣਾ ਮੋਖੇ ਜਾਂਦਾ ਪੱਟ ਗਵਾ ਕੇ ਜਾਂਦਾ ਹਾਂਜੀ ਕਾਈ ਆਸਨਾ ਪੁੰਨੀਆਂ ਨਿਤ ਪਰਮਲ ਹਿਰਤੇ ਬੱਸ ਕੋਈ ਆਸ ਨਹੀਂ ਪੂਰੀ ਹੋਈ ਜਿਤ ਕਰਦਾ ਨਹੀਂ ਸੀ ਪਰਮਲ ਹਿਰਤੇ ਲੋਕਾਂ ਨੂੰ ਤਾਂ ਉਪਦੇਸ਼ ਕਰਦਾ ਸੀ ਇਹਦਾ ਗੁਰੂ ਫੜਿਆ ਗਲਾਮੇ ਤੇ ਇਹਦਾ ਉਪਦੇਸ਼ ਕਰਦਾ ਤਾਂ ਪਰ ਮਾਲ ਹਿਰਦੇ ਮਾਲ ਦੂਜਿਆਂ ਦੇ ਹਿਰਦੇ ਨਹੀਂ ਮਾਲ ਧੋਣਾ ਸੀ ਗੁਰੂ ਸੀਗਾ ਗੁਰੂ ਜਿਹੜਾ ਗੱਲਾਂ ਮੈਂ ਤੇ ਫੜਿਆ ਉਪਦੇਸ਼ ਜਿਹੜਾ ਸੀਦਾ ਸੱਚ ਤੋਂ ਉੱਟ ਉਪਦੇਸ਼ ਤੇ ਦੋਜੀ ਸਾਖ ਤਾਂ ਉਪਦੇਸ਼ ਦੋਸੀ ਸਾਖਤ ਸੀ ਗੁਰੂ ਬਣੇ ਬੈਠਾ ਇਹ ਜਿਵੇਂ ਅੱਜ ਕੱਲ ਵੀ ਰਿਵਾਜ ਚੱਲਿਆ ਹੋਇਆ ਹੈ ਗੁਰ ਕੇ ਚਰਨ ਧੋਏ ਧੋਏ ਪੀਵਾ ਉਹ ਆਪਣੇ ਜਿਹੜੇ ਪੈਰ ਹੈ ਉਹਨਾਂ ਦਾ ਪਾਣੀ ਸੰਗਤਾਂ ਨੂੰ ਛਕਾਈ ਜਾਂਦੀ ਹੈ ਧੋ ਧੋ ਕੇ ਜੀ ਕੁਝ ਦੱਸਦੀ ਹੋਰ ਵੀ ਕਾਫੀ ਇਹ ਜੀ ਉਹ ਵੀ ਬੜੇ ਜਾਣਗੇ ਉਹ ਡਰ ਕੇ ਹੱਝਾਨਗੇ ਆਤਾ ਇਹ ਫਿਰ ਉਹਨਾਂ ਵਾਸਤੇ ਪੰਕਤੀ ਹੈ ਨਾ ਜੀ ਨਿਤ ਪਰਮਲ ਹਿਰਦੇ ਲੋਕਾਂ ਵਾਸਤੇ ਹੀ ਪੰਕਤੀਆਂ ਪੜਦੇ ਨਹੀਂਆਂ ਉਹਦੇ ਨਹੀਂ ਬਾਣੀ ਪੜਦੇ ਤੇ ਦੇ ਅੰਦਰ ਰਹਿੰਦੇ ਨੇ ਕਹਿੰਦੇ ਕੁਛ ਜੇ ਬਾਹਰ ਧੁਰ ਪੜ ਲੈਂਦੇ ਹੈ ਜੀ ਇਹ ਨਰਤੀਆਂ ਕਿਉਂ ਕਰਦੇ ਠੀਕ ਹੈ ਜੀ ਇਹ ਸਾਰੀ ਬਾਣੀ ਪੜ ਲੈਂਦੇ ਆ ਜਿਹੜੇ ਛੋਟੀਆਂ ਛੋਟੀਆਂ ਗਲਤੀਆਂ ਕੀਤੀਆਂ ਨੇ ਇਹਨਾਂ ਨੇ ਜਿੱਥੇ ਫਸ ਗਏ ਕਿਉਂ ਕਰਦੇ ਹੈ ਨਾ ਜਾਣੇ ਅਕਿਰਤ ਕਾਣ ਜੋਨੀ ਫਿਰਤੇ ਸੱਬੇ ਤਰਨ ਨਿਕੁੱਟਿਸ ਫਿਰ ਲਈਐਸ ਧਰਤੇ ਉਹ ਪਰਮੇਸ਼ਰ ਨੇ ਜੋ ਕੀਤਾ ਨਾ ਉਰਥਾਰ ਖਾਤਰ ਕਰ ਰਿਹਾ ਹੈ ਇਹਦੇ ਖਾਤਰ ਵੀ ਕਰ ਰਿਹਾ ਹੈ ਉਹ ਨਹੀਂ ਜਾਣਦਾ ਉਹ ਤਾਂ ਮੈਂ ਕਰ ਰਿਹਾ ਆਪ ਕਰ ਰਿਹਾ ਪਰਮੇਸ਼ਰ ਦੀਆਂ ਜਿਹੜਾ ਪਰਮੇਸ਼ਰ ਤੇ ਨਹੀਂ ਹੋਇਆ ਨਾ ਨਹੀਂ ਹੋਇਆ ਬੇਇਨਸਾਫ ਨਹੀਂ ਹੋਈ ਉਹ ਤੇ ਉਹ ਆਪ ਕਰ ਰਿਹਾ ਪਰਮੇਸ਼ਰ ਦੇ ਪੇੜ ਜਿਹੜੇ ਨਹੀਂ ਲੱਗੇ ਨਾ ਕਮਜ਼ੋਰੀ ਰਹਗੀ ਉਹ ਜੋ ਨਹੀਂ ਪੂਰੀ ਕਰ ਰਿਹਾ ਉਹ ਕਾਇ ਗੱਲ ਸੀ ਧਰਤੀ ਆਪਣੇ ਆਪ ਬਣਾ ਲਏ ਉਹਦੇ ਤੇ ਲੱਗਦਾ ਪੇੜ ਉਹਦਾ ਉਹਦੀ ਧਰਤੀ ਬਣਾਈ ਤੇ ਹੀ ਬੀੜ ਲਈ ਜਿੰਦਾ ਪੇੜ ਵੀ ਉਹਨੇ ਪੈਦਾ ਕੀਤਾ ਧਰਤੀ ਗੱਡੀ ਵਾਹਣ ਕਿਸੇ ਦਾ ਢਿਚਕਾਰੀ ਯਾਰਾ ਸੀ ਤਾਂ ਉਹ ਮਾਰਦਾ ਉੱਤੇ ਬੈਠ ਕੇ ਗੱਡੀ ਵਾਹਣਦੇ ਨਹੀਂ ਹੈ ਤੇ ਹੈਗੇ ਇਹਦਾ ਬੈਠ ਗਿਆ ਬਸ ਪੁਰਾਣੀ ਲੈ ਕੇ ਮਾਲਕ ਬਣ ਗਿਆ ਮੈਂ ਕਰਦਾ ਪੇੜ ਵੀ ਕਿਹਦੇ ਤੋਂ ਪੈਦਾ ਕੀਤਾ ਇਹ ਪਰਮੇਸ਼ਰ ਨੇ ਕੀ ਤੇ ਬਿਨਾ ਪੇੜ ਨਹੀਂ ਪੈਦਾ ਹੁੰਦਾ ਕੀ ਕਿੱਧਰ ਕੇ ਆਊਗਾ ਪੇੜ ਕਿੱਥੋਂ ਪੈਦਾ ਕਰੂਗਾ ਧਰਤੀ ਕਿੱਥੋਂ ਲੈ ਕੇ ਆਊਗਾ ਸੰਗਤ ਕਰਨੇ ਆ ਤੂੰ ਕੋਠੇ ਪੱਗੇ ਲੈਣਾ ਕੋ ਸਤਾ ਕੰਮ ਕਰਲਾ ਆਪਣੇ ਜੋਗਾ ਕੀਆ ਨਾ ਜਾਣੇ ਕਿਰਤ ਕਰਨ ਵਿੱਚ ਜੋਨੀ ਫਿਰਤੀ ਵਿੱਚ ਜੋਨੀ ਫਿਰਦਾ ਫਿਰਦਾ ਰਹੂਗਾ ਜੋਦੀਆਂ ਸਾਫ ਕਰਦਾ ਰਹੂਗਾ ਮੱਛੀ ਵਾਲਾ ਪਾਣੀ ਸਾਫ਼ ਕਰਦੀ ਐ, ਉੱਛੀ ਪਾਣੀ ਜਾਂਦਾ ਦੇ ਨਹੀਂ ਆਂਜੋਨਾ ਮੱਛੀ ਦੇ ਮਿਲ ਜਾਣਗੇ ਆ। ਮੱਛੀ ਦੀ ਜòn ਮਿਲੇ ਜਾਣੀ ਪਾਣੀ ਸਾਫ਼ ਕਰ ਲੈਣੇ ਗਾਹ ਨੂੰ ਮੱਛੀ ਦੀ ਜਿਹੋ ਜਿਹੜੀਆਂ ਮਰਜੀ। ਸਾਧੂ ਮਿਲ ਜਾਂਦੇ ਸਭੇ ਤੇਰਾਂ ਨਿਖੁੱਟੀ ਫਿਰ ਲਈਏ ਇਸ ਧਰ ਤੇ। ਸਾਰੀਆਂ ਤੇਰਾ ਘੋਟੀਆਂ ਸਾਧੂ ਹੋ ਜਾਂਦੀਆਂ ਨੇ ਤੇ ਇੱਕ ਤਾਂ ਤੇ ਉੱਤੇ ਤਾਂ ਖਿਆਰਾ ਕੋਈ ਮਿਲ ਲਈਆ ਉਹ ਬਹੁਤ ਕੁਝ ਕਰਦੇ ਨੇ ਲੋਕ ਭਲੇ ਦੇ ਤੌਰ ਤੇ ਪਰ ਆਪਣੀ ਮਰਜ਼ੀ ਨਾਲ ਕਰਦੇ ਨੇ ਗੱਲ ਆਪਣੀ ਮਰਜ਼ੀ ਦੀ ਹੈ ਉਹਦੇ ਕਿਰਾਏ ਤੇ ਵੀ ਕਰਦੇ ਜਿਵੇਂ ਉਹ ਚਲਾਉਂਦੇ ਉਹਵੇਂ ਦੀ ਚੱਲਦੇ ਆਪਣੀ ਮਰਜ਼ੀ ਦੇ ਜਿੰਨੇ ਵੀ ਲੋਕ ਆਪਣੀ ਮਰਜ਼ੀ ਤੋਂ ਕੰਮ ਕਰਦੇ ਨੇ ਸਭ ਖੋਟੇ ਦੇ ਜਿਹੜੇ ਸਾਡੇ ਅੰਦਰੋਂ ਖੁੱਲ੍ਹਦੇ ਉੱਠਦੇ ਨੇ ਅਸੀਂ ਉਹਨਾਂ ਮਗਰ ਚੱਲਦੇ ਆਂ ਉਹ ਸਭ ਖੋਟ ਐ ਖਬਰਾਂ ਕਰਨਾ ਕਿ ਜੀ ਸੰਤ ਮਾਰਤੇ ਹੋਣੇ ਇਹਨਾਂ ਨੇ ਉਸ ਪਾਣੀ ਦੇ ਵਿੱਚ ਗੱਧਲੇ ਚ ਅਰਬਾਂ ਖਰਬਾਂ ਜੀ ਉਸ ਗੱਧਲੇ ਪਾਣੀ 'ਚ ਹੋਣੇ ਨੇ ਜੇ ਉਹਨਾਂ ਦਾ ਸਾਹ ਖਰਾ ਅਰਬਾਂ ਖਰਬਾਂ ਜੀ ਵਰ ਜਾਣਗੇ ਉਹਨਾਂ ਦਾ ਅਪਰਾਧ ਕੌਣ ਸਕੂ ਉਹ ਖਰਬਾਂ ਜੀ ਜਿਹੜੇ ਮਰ ਗਏ ਉਹਨਾਂ ਨੂੰ ਕਿੱਥੇ ਉਹਨਾਂ ਖਾਤਰ ਜਗ੍ਹਾ ਅਲੱਗ ਬਣਾ ਦੇਣੀ ਸੀ ਇਹਨਾਂ ਨੇ ਉਹਨਾਂ ਨੇ ਇਤਰਾਮੇ ਬਣਾ ਦੇਣਾ ਸੀ ਕਿਤੇ ਫਿਰ ਗਏ ਧਰਤੀ ਦੇ ਉੱਤੇ ਠੱਗੇ ਗਏ ਹੋ ਪੇਪ ਕੋ ਬਣ ਗਏ ਹੋ ਕਰਦੇ ਤਾਂ ਆਪਣੇ ਨਾਲ ਦਾ ਸਿਆਣੇ ਲੋਕ ਵੀ ਉਹਨਾਂ ਨੂੰ ਸਿਆਣੇ ਸਮਝਦੇ ਨੇ ਹਾਰ ਤਾਂ ਪੁੱਲਦੇ ਨੇ ਉਹਨਾਂ ਦੇ ਗੁੜਾਂ ਚ ਮੰਤਸਰ ਚੰਨਲ ਨੇ ਨੇੜੇ ਚਲੇ ਜਾਵੇ ਰੱਡ ਜਿ ਸੋਨ ਤਾਂ ਹੋ ਜਾਂਦੀ ਹੈ ਪਰ ਬਾਸ ਜਿਹੜਾ ਉਹ ਕੁਝ ਨਹੀਂ ਹੁੰਦੀ ਇਹਨਾਂ ਦੇ ਨੇੜੇ ਆਲੇ ਤਾਂ ਹੁੰਦੇ ਨੇ ਰੱਡਾਂ ਜਿਹੜੇ ਇਹਨਾਂ ਦੇ ਆਲੇ-ਦਾਲੇ ਹੁੰਦੇ ਨੇ ਠੀਕ ਹੈ ਸੰਤਾਂ ਦੇ ਆਪ ਸੰਤ ਬਾਨੇ ਹੁੰਦੇ ਨੇ ਹਾਂਜੀ ਵਿੰਜਨ ਕਲਾ ਨਾ ਦੇਵਦਾ ਤਾਂ ਲੱਇਆ ਕਰਤੇ ਨੇ ਝੜ ਕੇ ਧਰਤੀ ਤੇ ਬਹਿ ਜਾਂਦਾ ਉਹ ਅੱਛਾ ਜੀ ਇਹਨੂੰ ਉੱਤੇ ਚਾਹਵਦਾ ਉੱਤੇ ਜਾਵਰ ਦਾ ਧਾਤੀ ਦੇ ਤੇ ਹੋਇਆ ਹੋਰ ਕੀ ਗੱਲ ਹੈ ਜੇ ਤਾਂ ਹੋਂਦੇ ਚ ਪ੍ਰਸ਼ਾਦ ਤਾਂ ਕਰਤੇ ਨੇ ਜਿਹੜਾ ਆਪਣੇ ਅੰਤਰਾਤਮਾ ਦਾ ਹੀ ਵਿਰੋਧ ਕਰਦਾ ਹੈ ਆਪਣੇ ਆਤਮਾ ਦੀ ਉਹ ਗੱਲ ਅੰਤਰਾਤਮਾ ਤੇ ਬਿਨਾ ਕੱਲਾ ਚੱਲਦਾ ਹੈ ਉਹ ਜ਼ਮਾਂ ਜਾਂਦਾ ਫਿਰ ਬਾਂਸ ਵਾਂਗੂ ਉਹ ਝੜ ਕੇ ਧਰਤੀ ਤੇ ਪੈਂਦਾ ਇਹ ਕੀ ਹੁੰਦਾ ਜੀ ਵਿੱਜਣ ਕਲਾ ਦਾ ਦੇਵਤਾ ਇਹ ਕੋਈ ਸਿਰ ਪਰ ਸਰੂਪਾ ਦੇਣਾ ਹੁੰਦਾ ਉਹ ਹੈ ਨਹੀਂ ਅਸਲ ਦੇ ਵਿੱਚ ਉਹ ਜਾਨਾ ਵਿੱਦਣ ਦੀ ਆਵਾਜ਼ ਨੂੰ ਦਬਾ ਕੇ ਹਾਵੀ ਹੋ ਗਏ ਉਹਦੇ ਤੇ ਆਪਣੇ ਅੰਤਰਾਤਮਾ ਦੇ ਹਾਵੀ ਹੋ ਜਾਂਦੇ ਆਪੇ ਆਪੇ ਸੰਤ ਬਣ ਜਾਂਦੇ ਨੇ ਸੰਤਤਾ ਉਹ ਸੰਤ ਬਣ ਕੇ ਆਪ ਉਹਦਾ ਦਾ ਕਰਤਾ ਕਤਲ ਠੀਕ ਹੈ ਅੰਤਰਾਧਵਾਨ ਕਤਲ ਕਤਲ ਹੁੰਦੇ ਨੇ ਅੰਤਰਾਧਵਾਨ ਦੇ ਤੁਛਾਲ ਦੀ ਵਡਿਆਈ ਜਿਹੜਾ ਆਦਮੀ ਚਾਹੁੰਦਾ ਅੰਤਰਾਧਵਾਨ ਦਾ ਕਤਲ ਹੁੰਦਾ ਉਹ ਹਾਂ ਕਾਰੀ ਬਹੁਤ ਬੜਾ ਠੀਕ ਹੈ ਜੀ ਵਿੱਜਣ ਕਲਾ ਦਾ ਦੇਵ ਦਾ ਖਤਰ ਦੇਵ ਇਹਨਾਂ ਦੇ ਵੀ ਹੈ ਦੇਵ ਦੀ ਕਲਾ ਨਹੀਂ ਲਈ ਦੇਵ ਦੀ ਅਕਲ ਨਹੀਂ ਲਈ ਹੈ ਦੁਨੀਆ ਦੀ ਵਡਿਆਈ ਦੇ ਕਈ ਉੱਚਾ ਉੱਠ ਗਿਆ ਕਰਤੇ ਨਾਲ ਉੱਧ ਲਾਤਾ ਫੁੱਟੇ ਬਾਸੇ ਲਾਤਾ ਜੋ ਜੋ ਕਰਤੇ ਅਹਮੇ ਉਹ ਝੜ ਧਰਤੀ ਪੜਤੇ ਮਾਝੋ ਜੋ ਕਰਤੇ ਨੇ ਆਕਾਰ ਵਿੱਚ ਵਧਾਕਾ ਉੱਚਾ ਕਰਤਾ ਬਾਣ ਸੁਵੋਂ ਝੜ ਧਰਤੀ ਤੇ ਹੀ ਬੈਣਾ ਉਸ ਹੁਣ ਕਰਤੇ ਦਾ ਮਤਲਬ ਇਹ ਨਹੀਂ ਵੀ ਆਪਣੇ ਆਪ ਚ ਹਮੇ ਕਰਦੇ ਹੁਣ ਉਹ ਕਰਤਾ ਵੀ ਕਹਿੰਦਾ ਚੜ ਜਾ ਬੱਚਾ ਛੂਲੀ ਭਰੀ ਕਰੇਂ ਤੇ ਰਾਮ ਹੋ ਜਾ ਨਹੀਂ ਮੰਨਦਾ ਉਹਦੀ ਅੱਛਾ ਜੀ ਉਹ ਮਾਂ ਬਾਪ ਦੀ ਕੋਈ ਨਾਮਤ ਦੇ ਉਹ ਕਹਿੰਦਾ ਕਿੰਦਾ ਭਾਈ ਕਰਕੇ ਦੇਖ ਲੈ ਹੋਰ ਕੀ ਕਰੂਗਾ ਠੀਕ ਹੈ ਬਾਪ ਨਹੀਂ ਕਬੂਦਾ ਨਹੀਂ ਬੰਦਾ ਉਹ ਕਹਿੰਦਾ ਮੈਂ ਤਾਂ ਨਹਿਤ ਮਾਰੂ ਜੇ ਮੈਨੂੰ ਆਸਟ੍ਰੇਲੀਆ ਦੀ ਭੇਜ ਦੇ ਕਹਿੰਦਾ ਭਾਈ ਤੂੰ ਦਾਰਜਾਲੂ ਝਾਲ ਮਾਰਦੀ ਐ ਤੂੰ ਆਸਟ੍ਰੇਲੀਆ ਹੀ ਜਾ ਠੀਕ ਤੇ ਤੇਰਾ ਤੇ ਪੈਸੇ ਤੇ ਕੰਮ ਕਰਨਗੇ ਪਏ ਹੋ ਜਾਣ ਨਾਲੇ ਤੈਨੂੰ ਕੀ ਆਲਾ ਘੱਟੋ-ਘਾਟਾ ਕਰਦਾ ਇੰਦੈਨ ਮੈਂ ਜਾਲ ਮਾਰਤੀ ਰੁਪਈਏ ਵੀ ਇੱਥੇ ਰਹਿ ਜਾਣਗੇ ਤੂੰ ਵੀ ਜਾਏਗਾ ਸਾਡੇ ਇਥੋਂ ਰੁਪਈਏ ਤੂੰ ਤਾਂ ਰਹਿ ਜਾਏਗਾ ਸਾਡੇ ਕੋਲ ਨਾਲੇ ਤੈਨੂੰ ਅਕਲ ਆ ਤੇ ਰੁਪਈਏ ਅਕਲ ਆਉਣ ਜੋ ਤੈਨੂੰ ਸਾਨੂੰ ਸਿੱਖਿਆ ਦਿਆ ਕਰ ਇਹਦਾ ਜਿਹੜੇ ਜਿਹੜੇ ਸਿਆਣੇ ਹੁੰਦੇ ਨੇ ਉਹ ਆਪ ਦੀਵੇਂ ਹੋ ਜਾਂਦੇ ਹੁੰਦੇ ਨੇ ਜੇ ਜੀਵੇ ਹੋਣ ਦਾ ਨਾ ਸਿਆਣਾ ਜੀਵੇ ਸਿਆਣਾ ਉੱਚੇ ਸੋ ਗੌਰਾ ਹੋਏ ਪਹਿਲੀ ਪੁੰਤੀ ਦੇ ਵਿੱਚ ਕੇ ਚੱਲਿਆ ਹੋਇਆ ਜੇ ਮੂਰਖ ਨਾਮ ਲੈ ਤਸਿਆਣਾ ਬਦ ਜਾਂਦਾ ਗਲਤ ਗੱਲ ਵੀ ਸਿਆਣਾ ਸਿਆਣਾ ਮੂਰਖ ਦੀ ਬਦ ਜਾਂਦਾ ਚੱਲ ਭਾਈ ਤੇਰੀ ਉਹ ਗੱਲ ਠੀਕ ਹੈ ਯਾਰ ਬਾ ਕਰ ਲੈ ਯਾਰ ਵੇਜ ਤੌਹੀਦ ਕਰ